ਸ਼ਲੋਕ ਮਹੱਲਾ ਪਹਿਲਾ ਲੱਖ ਸਿਉ ਪ੍ਰੀਤ ਹੋਵੈ ਲੱਖ ਜੀਵਨ ਕਿਆ ਖੁਸ਼ੀਆਂ ਕਿਆ ਚਾਓ ਵਿਛੜਿਆ ਵਿਸ ਹੋਏ ਵਿਛੋੜਾ ਏਕ ਘੜੀ ਮਹਿ ਜਾਏ ਆ ਤਾਂ ਕਹਣਾ ਸਾਡਾ ਬ੍ਰੇਮ ਹੋਵੇ ਜਿਵੇਂ ਲੀਡਰਾਂ ਦਾ ਹੁੰਦਾ ਹੈ ਬਹੁਤੇ ਆਦਮੀਆਂ ਦਾ ਹੁੰਦਾ ਹੈ ਵਿਆਹ ਸ਼ਾਦੀਆਂ 'ਚ ਲੱਖਾਂ ਆਦਮੀ ਆਉਂਦੇ ਨੇ ਕਾਰਡ ਦੱਲੇ ਹੋ ਤੇਲ ਬਲਫ ਹੁੰਦਾ ਹੈ ਵੱਡਾ ਆਦਮੀ ਹੋਵੇ। ਲੱਖ ਤੋਂ ਪ੍ਰੀਤ ਹੋਵੇ। ਲਖਜੀਵ ਲਖਜੀਵਨ ਨਕੰ ਭਰਿਆ ਦਾ ਜੀਵਨ ਵੀ ਹੋਵੇ। ਕਿਆ ਖੁਸ਼ੀਆਂ ਕਿਆ ਚਾਹੋ? ਇਹ ਖੁਸ਼ੀਆਂ ਚਾਹੋ ਕਾਰੇ ਖਤਮ ਨੇ। ਇਹ ਖੁਸ਼ੀਆਂ ਚਾਹੋ ਤਾਂ ਮਿਲਦਾ ਖੁਸ਼ੀ ਹੁੰਦੀ ਹੈ। ਕਿਸੇ ਦੇ ਵਿਆਹ ਹੁੰਦਾ ਚੌੜ ਚੜਦਾ। ਕੋਈ ਨਾ ਕੋਈ ਰੋਜ਼ ਹੁੰਦਾ ਹੀ ਰਹਿੰਦਾ। ਬਰਦਾਸ਼ਤ ਕੋਈ ਵਿਛੜਦਾ ਨਾ ਫਿਰ ਪਤਾ ਲੱਗਦਾ ਹੈ। ਕਿੱਟਣਿਆ ਪਸੂ ਹੋਏ ਵਿਛੋੜਾ ਉਹ ਵਿਛੋੜਾ ਹੀ ਮਿਸ ਬਣ ਜਾਂਦਾ ਹੈ। ਫਿਰ ਬਰਦਾਸ਼ਤ ਨਹੀਂ ਹੁੰਦਾ ਵਿਛੋੜਾ। ਐਨਾ ਜ਼ੋਰ ਦਾ ਬੇਲਣ ਕਰ ਲੈਂਦੇ ਨੇ। ਉਹ ਰੂਹ पे ਟੁੱਟਣਾ ਬਹੁਤ ਔਖਾ ਬਹੁਤ ਬੜਾ ਝਟਕਾ ਲੱਗਦਾ ਇੱਕ ਘੜੀ ਮੈਂ ਜਾਏ ਬਸ ਜਾਂਦੇ ਨੂੰ ਘੜੀ ਮਦੀ ਲੱਗਦੀ। ਜਿੰਨਾ ਜ਼ਿਆਦਾ ਮੇਲ ਹੁੰਦੇ ਉਹਨੇ ਜ਼ਿਆਦਾ ਝਟਕੇ ਲੱਗਦੇ। ਤੀਕੇ ਪਰ assi ਇਕੱਠ ਕਰਕੇ ਬੜਾ ਰਾਜੀ ਰਹਨੇ ਆ ਵੀ ਜੀ ਕਿਸੇ ਦਾ ਬੰਦਾ ਬਹੁਤ ਵੱਡਾ ਜੀ ਜੀ ਜੇ ਸੋ ਵਰਿਆਂ ਮਿੱਠਾ ਖਾਜੈ ਭੀ ਫਿਰ ਕੌੜਾ ਖਾਏ ਮਿੱਠਾ ਖਾਦਾ ਚੇਤਨਾ ਆਵੇ ਕੁੜਤਣ ਧਾਏ ਜਾਏ ਸੋ ਵਰੇ ਮੱਛਰਾਂ ਨਾਲ ਰਹੇ ਮੱਛਰ ਕਰਕੇ ਕਰਕੇ ਖਾਇਆ ਮਾਇਆ ਖਤਰਾ ਰਹੇ ਸੋ ਮੋਖਾ ਖਾਦਾ ਰਹੇ ਸੋਭਰੇ ਮੋਜ ਫਸਿਆ ਰਹੇ ਉਹ ਮਿੱਠਾ ਲਾਇਆ ਫਿਰ ਉਹ ਬਿੱਠਾ ਖਾਜਾ ਈ ਫਿਰ ਕੌੜਾ ਖਾਏ ਕਿਤੇ ਕੌੜਾ ਖਾਣਾ ਪੈ ਜਵੇ ਫਿਰ ਸੱਚ ਖਾ ਲਉ ਪੈ ਮਿੱਠਾ ਖਾਦਾ ਜਿਤਨਾ ਆਵੇ ਫਿਰ ਮਿੱਠਾ ਖਾਦਾ ਭੁੱਲ ਜਾਂਦਾ ਕੌੜਾ ਤਨ ਖਾਏ ਜਾਏ ਕੌੜਾ ਤਨ ਭੱਜੀ ਜਾਂਦੀ ਹੈ ਕੱਢ ਭੱਜਦੀ ਹੈ ਬਸ ਜਿਆਦਾ ਆ ਕੇ ਕਮਕਾਲ ਘਰਸਦਾ ਹੈ ਨਾ ਤੇ ਜਿਹੜੇ ਮਿੱਠੇ ਪਦਾਰਥ ਪਤੇ ਨੇ ਕਹਿੰਦੇ ਨੇ ਫਲਾਨਾ ਜੂਸ ਨੇ ਉਹ ਕਹਿੰਦਾ ਬਸ ਦੂਰ ਰੱਖੋ ਜੀ ਨਹੀਂ ਕਰਦਾ ਨਾ ਅਗਲਾ ਕਨਾਰਾ ਦੀ ਜਾਂਦਾ ਨਾ ਸਾਰੇ ਕੌੜੇ ਹੋ ਜਾਂਦੇ ਸਭ ਰਾ ਜਿਹੜੇ ਨੇ ਸਾਰੇ ਕੌੜੇ ਹੋ ਜਾਂਦੇ ਕਿਉਂ ਉਦੋਂ ਸੱਚ ਨੂੰ ਬੰਦ ਹੁੰਦਾ ਵੀ ਹੁਣ ਭਈ ਜਾਣ ਲਈ ਉਹ ਖਾਂਦਾ ਹੀ ਪੈਣਾ ਹੈ ਉਹਨੂੰ ਬਦਲਣਾ ਹੀ ਪੈਣਾ। ਉਹ ਸੱਚ ਨੂੰ ਬਦਲਣਾ ਹੀ ਪੈਣਾ। ਪਹਿਲਾਂ ਤਾਂ ਤੇ ਸਿਆਸੀ ਬਣਨ ਬਸਾਰਿਆ ਸੀ। ਤੇ ਮਰਦਾ ਹੀ ਨਹੀਂ। ਕਿਆ ਮਰਨਾ ਨਿਸ਼ਚਿਤ ਹੋ ਗਿਆ। ਕਿਹੜਾ ਸਭ ਕੁਲ। ਕੋਣਾ ਸੱਚ ਕੌੜਾ ਲੱਗਣ ਲੱਗੇ ਹੁਣ ਪਤਾ ਲੱਗਿਆ ਵੀ ਇਹ ਕੌੜਾ ਹਾਂਜੀ। ਇਹ ਬਾਹਰਲੇ ਭੋਗਾਂ ਦੀ ਗੱਲ ਹੈ ਜੀ। ਹਾਂਜੀ ਆ ਬਾਹਰਲੇ ਭੋਗਾਂ ਦੀ ਗੱਲ। ਠੀਕ ਹੈ ਕਹਿਣ ਦਾ ਭਾਵ ਇਹ ਹੈ ਕਿ ਮਿੱਠਾ ਜਿਹੜਾ ਹੈਗਾ ਜੇ ਖਾਂਦਾ ਰਹੇ ਉਸ ਵੀ ਦੇ। ਉਹ ਬਾਲ ਨੇ ਤੇ ਬਲ ਨੇ ਉਹ ਤਾਂ ਡੇੜੇ ਵੀ ਨਹੀਂ ਆਉਂਦੇ ਫਿਰ। ਹਾਂਜੀ। ਕੋੜਤਨ ਧਾਏ ਜਾਏ। ਬੁੜਕਾ ਆਪੇ ਚਲੀ ਗਈ। ਬੁੜਕਾ ਕੀ ਕਰੂਗੀ। ਹੁਕਮ ਦਾ ਸੱਤ ਆ ਗਿਆ। ਰਵਾਨਾ ਦਾ ਫਿਰਦਾ ਨਹੀਂ ਹੈ। ਜਦ ਰੁਮਾਇਆ ਪਰਬਾਨਾ ਉਹ ਤਾਂ ਫਿਰਦਾ ਨਹੀਂ। ਹਾਂਜੀ। ਠਾਕੌੜਾ ਦੋਵੇਂ ਰੋਗ ਨਾਨਕ ਅੰਤ ਵਿਗੁੱਤੈ ਭੋਗ। ਛਾਇ ਮਿੱਠਾ ਛਾਇ ਕੌੜਾ ਦੋਵੇਂ ਰੋਗ ਨੇ। ਆ ਦੁਨੀਆਂ ਦਾ ਮਿੱਠਾ ਛਾ ਦੁਰੀਆਵੀ ਮਿੱਠਾ ਲੋ। ਸਰੀਰ ਨਾਲ ਖਾਂਦੇ। ਇਹ ਸੌੜੇ ਮਿੱਠੇ ਦੀ ਗੱਲ ਨਹੀਂ ਕਰ ਰਹੇ ਆਤਮਾ ਦੇ ਮਿੱਠੇ ਕੌੜੇ ਦੀ ਗੱਲ ਕਰ ਰਹੇ। ਇਹ ਤਾਂ ਚਾਹੇ ਬਿਚਾ ਭਾਈ ਚਾਹੇ ਘੋੜੇ ਦੋਬੀ ਰੋਗ ਹੈ ਨਾਮ ਦਾ ਮੱਠਾ ਰੋਗ ਨਹੀਂ ਹੈ ਰੋਗ ਦਾ ਬਿਚਾ दारू ਹੈ ਸਾਰ ਰੋਗ ਉਹ ਹੀ ਰੋਗ ਹੈ ਸੰਸਾਰੀ ਜਿਹੜਾ ਸੰਸਾਰੀ ਦੀ ਗੱਲ ਕਰਤੀ ਪੰਪੀ ਚ ਰੋਗ ਨੇ ਕੋਈ ਗੱਲ ਦੀ ਦੋਬੇ ਰੋਗ ਜੀ ਨਾਨਕ ਅੰਤ ਭੋਗ ਇਹ ਜਿਹੜੇ ਭੋਗ ਨੇ ਔੜੇ ਵਿੱਚ ਅੰਤ ਵਾਜੇ ਨੈਰੀ ਲਗਣ ਇਹ ਕਹਿੰਦਾ ਵੀ ਲਾਇਸ਼ ਹੋ ਜਾ ਕੇ ਮੇਰੇ ਕੋਲ ਇਹਨਾਂ ਭੋਗਾਂ ਨੇ ਬੁਰਾ ਚਾ ਦੱਤਾ ਨਾਮ ਦੀਦੋ ਮਿਲਿਆ ਭੋਗਾਂ 'ਚ ਫਸਿਆ ਰਿਹਾ ਨਾਮ ਦਾ ਦੇ ਰਸ ਦੀ ਲੋੜ ਹੀ ਇਹਨਾਂ ਨੇ ਭੁਲਾ ਕੇ ਰੱਖਿਆ ਤੇ ਨੇ ਇਹਨਾਂ 'ਚ ਫਸਿਆ ਰਿਹਾ ਚੱਖ ਚੱਖ ਛਕਣਾ ਝਗੜਾ ਝਾਖ ਚੱਖ ਚੱਖ ਜਾਹੇ ਚਖੈਂ ਪਾਸ ਚੱਕ ਚੱਕ ਖੜਾ ਜਿਹੜਾ ਚੱਕ ਮਾਰਦੇ ਲੈ ਇੱਕ ਦੂਰੇ ਨਾਲੇ ਵੀ ਚਰਕ ਬਤਰ ਕਰਕੇ ਪੱਲੇ ਕੁਛ ਬਰੀ ਇਹ ਚ ਲੜਾਈ ਐ ਚਾਹ ਘਿਚਾਖ ਉਹਦੇ ਨਾਲ ਚੱਕ ਮਾਰਦਾ ਉਹਦੇ ਨਾਲ ਚੱਕੇ ਮਾਰ ਚੱਕਾ ਤੇ ਚਾਹੇ ਤੇ ਖਲ ਪਾ ਚੱਕਾ ਉਹ ਜਾਂਦੇ ਨੇ ਵੜੀ ਜਾਂਦੇ ਨੇ ਚੱਕ ਮਾਰੀ ਜਾਂਦੇ ਨੇ ਵੜੀ ਜਾਂਦੇ ਨੇ ਅੱਗੇ ਜਾਈ ਜਾਂਦੇ ਨੇ ਕੋਲ ਜਾਂਦੇ ਨੇ ਅੱਗੇ ਫੇ ਦੇਖਦੇ ਨੇ ਫੋਟੇ ਕਰੇ ਦੀ ਪਛਾਣ ਵਾਲਿਆਂ ਕੋ ਜਾਈ ਜਾਂਦੇ ਇਹ ਤੇ ਮਾਰੀ ਆਈ ਜਾਂਦੇ ਨੇ ਹਾਂਜੀ ਮਹੱਲਾ ਪਹਿਲਾ ਕਾਪੜ ਕਾਠ ਰੰਗਾਇਆ ਰੰਗ ਕਰ ਗਜ ਕੀਤੇ ਬਾਗੇ ਬਾਗ ਹਨਾ ਕੱਪੜੇ ਰੰਗ ਲੈ શરીર ਨਾਲ ਕਲਿਆ ਕਾਠ ਕਾਠ ਦੇ ਕੱਪੜੇ ਦੇ ਕਾਪੜ ਦੇ ਨਾਲ ਕਾਠ ਆ ਗਏ ਕਾਠ શરીર ਹੈ ਕੱਪੜੇ ਉੱਤੇ ਪਾਉਣ ਵਾਲੇ ਨੇ ਇਹ ਰੰਗ ਲੈ ਰੰਗਾਲੇ ਰੰਗਾਇਆ ਰੰਗ ਰੰਗ ਜ ਰੰਗ ਲੈ ਜਿਹੜੇ ਤਰ੍ਹਾਂ ਜਿਹੜੇ ਤੇ ਪਲਾਸਟਰ ਕਰਨ ਲਈ ਗੱਜ ਪਲਾਸਟਰ ਨੂੰ ਕਹਿੰਦੇ ਨੇ ਉਹਦੇ ਬੜੇ ਇਹਦੇ ਨਾਲ ਕਰ ਦਿੰਦੇ ਜੂਤ ਦੇ ਨਾਲ ਗੱਜ ਚਿੱਟੇ ਬਾਗੇ ਬਾਗ ਬੱਗੇ ਕਰਦੇ ਬਗਲਿਆਂ ਨੇ ਠੀਕ ਹੈ ਜੀ ਚਿੱਟੇ ਰੰਗ ਦੇ ਬਣਾ ਲੇ ਚਿੱਟੇ ਰੰਗ ਦੇ ਚਿੱਟੇ ਰੰਗ ਦੇ ਬਣਾ ਜਿਵੇਂ ਆਪਣੇ ਚਿੱਟੇ ਪੱਥਰ ਦੇ ਬਣਾਉਂਦੇ ਨੇ ਗੁਰਦੁਆਰੇ ਹਾਂਜੀ ਵੀਰ ਜੀ ਦਾ ਸ਼ਲੋਕ ਵੀ ਇਹਦੇ ਬਾਰੇ ਤਾਂ ਆਗ ਲੱਗੇ ਇਸ ਢੋਲ ਹਰ ਜੇ ਨਾ ਹੀ ਹਰ ਕੋ ਨਾਉ ਤਾਲ ਹਰ ਵੀ ਬਾਗੇ ਬਾਗੇ ਹੀ ਹੈ। ਬਾਗੇ ਬਾਗੇ। ਠੀਕ ਸਾਦ ਸਹਜ ਕਰ ਮਨ ਖੇਲਾਇਆ ਤੈ ਸਹਿ ਪਾਸੋਂ ਕਹਿਣ ਕਹਾਇਆ। ਆ ਜਿਹੜੇ ਸਵਾਦ ਦੇ ਸੰਸਾਰੀ ਇਹਦੇ ਨਾਲੇ ਮਨ ਬਸ ਆਨੰਦ ਰਿਹਾ ਸਹਜ ਬਸ ਖੇਲਦਾ ਰਿਹਾ। ਮਨ ਵਾਸਤੇ ਸਭ ਕੁਝ ਕੀਤਾ। ਮਨ ਇਹਦੇ ਧੀਰਜ ਬੰਦੇ ਬੰਦਦਾ ਰਿਹਾ। ਤਰ ਖੇਲਾਇਆ। ਕਿਹਦੀ ਫਟਕਾਰਾਂ ਨਾਲ ਆਹ ਪੁਰਾਣੀ ਬੁੱਧੀ ਨੂੰ ਜਾ ਕੇ ਠੀਕ ਹੈ ਤੈਨੂੰ ਪਾਸੋਂ ਕਹਿਣ ਕਹਾਇਆ ਕਹਿਣ ਕਹਾਇਆ ਫਟਕਾਰਾਂ ਫੇਰ ਲਈਆਂ ਇੱਕ ਕਰਦੀ ਪੜਿਆ ਹੈ ਜੀ ਜੋ ਅੱਖਰ ਨਹੀਂ ਇਹਦੇ ਉਹ ਜਦ ਤੱਕ ਕਰ ਛੜਕਾ ਨਾ ਬੁੱਧੀ ਨਹੀਂ ਖਾਣੀ ਇਹਦੇ ਠੀਕ ਹੈ ਜੀ ਅੰਤਨ ਬੇੜਾ ਤੇਰੇ ਜੀ ਪੈ ਲੀ ਹੈ ਜੀ ਹਾਂ ਠੀਕ ਹੈ ਜੀ মিঠা करके कौडा खाया, তিন कौड़े तन रोग जमाया। মিঠা করকে কৌড়া খায়া ও পিঠা করকে খা লিয়া কৌড়া এ বো কৌড়া সি মিঠা করকে খা লিয়া আটা ন সর এর দে وچ রোগ জমালে রোগ দিঁড়اں جوں تیناں বݨدیاں ਉਹ ਜੰਮ ਗਿਆ ਹਾਂ ਨੋ ਜੰਮ ਗਿਆ ਉਹ ਜੰਮ ਗਿਆ ਗਿਆ ਸਾਰੇ ਜੰਮ ਗਿਆ ਜੇ ਫਿਰ ਮਿੱਠਾ ਪੇੜ ਐ ਪਾਏ ਤੋ ਕੁੜਤਨ ਚੁਕਸ ਮਾਏ ਅਜੇ ਹੁਣ ਵੀ ਮਿੱਠਾ ਪਾਲਵੇਂ ਪੀੜੇ ਚ ਖਾਣ ਲੱਗ ਜੇ ਗੁਰਬਾਣੀ ਇਹਦਾ ਪਾਲਵੇਂ ਪੋਰਾ ਪੋਰਾ ਛੱਦ ਮੇ ਵੇੜੇ ਤੇ ਪਾਲਾ ਰੋਟੀ ਪੱਕ ਜੂਗੀ ਇਹ ਅੰਦਰ ਜਾਣ ਲੱਗ ਜਵੇ ਫੇਰ ਵੀ ਕਿਨਾ ਕੁਛ ਫਰਕ ਪੈ ਜੂਗਾ ਫੇਰ ਬਦਲ ਜੂਗਲ ਛੱਡੇ ਕਰਮ ਹੋ ਜਾਣਗੇ ਫੇਰ ਨਾਨਕ ਗੁਰਮੁਖੀ ਪਾਵੈ ਸੋਏ ਜਿਸ ਪ੍ਰਾਪਤ ਲਿਖਿਆ ਹੋਈ ਨਾਨਕ ਗੁਰਮੁਖੀ ਪਾਵੈ ਸੋਏ ਨਾਨਕ ਕਹੈ ਕੋਈ ਗੁਰਮੁਖੀ ਪਾਉ ਗੁਰਮੁਖੀ ਪਾਉ ਇਹ ਪੜੇੰ ਵਿੱਚ ਗੁਰੂ ਕੀ ਪਾਵੈ ਸੋਈ ਜਿਸ ਨੂੰ ਪ੍ਰਾਪਤ ਕਿਹਾ ਹੋਈ ਉਹ ਜਿਹੜਾ ਲੈ ਕੇ ਲੈ ਸੀ ਨਾ ਜਨਮ ਤੋਂ ਪਹਿਲਾਂ ਉਹ ਪ੍ਰਾਪਤ ਹੋ ਜੇ ਵਿੱਚ ਗੁਰੂ ਵੀ ਪਾਲਵੇ ਕੁਰਬਾਨੀ ਦਾ ਰਸ ਜੇ ਕੁਰਬਾਨੀ ਦਾ ਰਸ ਉਹ ਵੀ ਪੜੇੰ ਚ ਪਾਲਵੇ ਨਾ ਸੱਚ ਦਾ ਰਸ ਉਹ ਫਿਰ ਬਦਲ ਜੂਗਾ ਆ ਰਸਤਾ ਦੁਆਰ ਵੀ ਦੁਜੇ ਕਟਿਆ ਜਾਂਦਾ ਝੂਠ ਤਾਂ फिर कुछ प्राप्ति हो जउगी ठीक है जी पौड़ी जिन के मैल कपट है बाहर तो वाया कूड़ कपट कमाव दे कूड़ प्रगति आया सिर के मैल कपट है जिनादे हृदय मैल है और कपट है वो गलत धर्म ही आदमी दे धर्म का दे, आ गया कादे खातिर कपट है ਦੇਈ ਗੁਰਮਤ ਫੈਲਣ ਦੇ ਦੀ ਕਸਤੇ ਹੈ ਸਾਡੇ ਵੱਡੇ ਵੱਡੇਰਾਂ ਨੇ ਨਹੀਂ ਫੈਲਣ ਦਿੱਤੀ ਅਸੀਂ ਇਹਦਾ ਵਿਰੋਧ ਕਰ ਲਈ ਗੱਲ ਇਹ ਕੱਪ ਹੈ ਭਾਰਤੋਂ ਵਾਇਆ ਬਾਲਾ ਸ਼ਰੀਰ ਧੋਈ ਜਾਂਦੇ ਨੇ ਸਰੋਵਰ ਬਣੇ ਹੋਏ ਨੇ ਦਰਿਆ ਬਣੇ ਹੋਏ ਨੇ ਕਿਨਾਰੇ ਤੇ ਭਾਰਤ ਹੋਈ ਜਨਨ ਕਰੀ ਜਾਓ ਭਾਰਤੋਂ ਵਾਇਆ ਬੰਦਾ ਧੋਈ ਜਾਂਦੇ ਨੇ ਪਿੰਡਾਂ ਧੋਈ ਜਾਂਦੇ ਨੇ ਕੂੜ ਕਪੜ ਕਮਾਉਂਦੇ ਕੂੜ ਪ੍ਰਗਟ ਆਇਆ ਉਹ ਲੋਕ ਆਲੀ ਰਹਿਣਾ ਜਿਹੜਾ ਕੂੜ ਕਰ ਵੀ ਕਮਾਈ ਤੁਸੀਂ ਕਪੜ ਦੀ ਦੱਦਿਆ ਹੋਣਾ ਜਾਂਦਾ ਨਾਲ ਦੀ ਨਾਲ ਸਭ ਦੁਨੀਆਂ ਜਾਣਦੀ ਇਹ ਕੂੜ ਆ ਤੁਹਾਡੇ ਚ ਕੂੜ ਕਪੜ ਕਮਾਉਂਦੇ ਕੂੜ ਪ੍ਰਗਟ ਆਇਆ ਜਿਹੜਾ ਕਮਾਈ ਆ ਪ੍ਰਗਟ ਹੋਊਗੀ ਉਹ ਵੀ ਪ੍ਰਗਟ ਹੋਊਗੀੁੱਧਰ ਹੋਏ ਸੜ ਕਲੇ ਨਾ ਛਪੇ ਛਪਾਇਆ ਜੋ ਬਸ ਫਾਂਦੇ ਨੇ ਤਰੂ ਉਹ ਉਹੀ ਨਿਕਲੂਗੇ ਤੇ ਮੈਂ ਛਪਾ ਲੂਗਾ ਤੁਸੀ ਮੈਂ ਛਪੇ ਛਪਾਇਆ ਕੂੜੇ ਲਾਲ ਚ ਲੱਗਿਆ ਫਿਰ ਜੋ ਨਹੀਂ ਪਾਇਆ ਜਦ ਕੂੜੇ ਲਾਲ ਤੇ ਪਿੱਛੇ ਲੱਗ ਆਇਆ ਦੂਜੀ ਜੂਦੀ ਫੇਰ ਪੈਜੂਗਾ ਆ ਇੱਥੇ ਹਾਂਜੀ ਅੰਦਰ ਹੋਏ ਸੋ ਨਿਕਲੈ ਨਾ ਛਪੇ ਛਪਾਇਆ ਕੂੜੇ ਲਾਲ ਲੱਗਿਆ ਫਿਰ ਜੂ ਪਾਇਆ ਹਾਂ ਜੋ ਅੰਦਰ ਹੋ ਉਹ ਨਿਕਲੂਗਾ ਜੇ ਬੋਲੂਗਾ ਛਪਾਇਆ ਕਿ ਬਿਸ਼ਕੂਗਾ ਕੂੜੇ ਲਾਲਚ ਲੱਗਿਆ ਫਿਰ ਜੋੜੀ ਪਾਇਆ ਜਿਹੜਾ ਕੂੜੇ ਲਾਲਚ ਲੱਗਿਆ ਫਿਰ ਜੋੜੀ ਪੈ ਜੂਗਾ ਕੁਕੀ ਦਾ ਲੋਭੀ ਨੋ ਪਿਛਲਾ ਜਨਮ ਤਾਂ ਜਾਈਂ ਚਲਾ ਗਿਆ ਠੀਕ ਦੂਜੇ ਚ ਹਾਰੇ ਹਾਂਜੀ ਨਾਨਕ ਜੋ ਬੀਜੇ ਸੁਖਾਵਣਾ ਕਰਤਾ ਲਿਖ ਪਾਇਆ ਕਰਦੇ ਨਾ ਕਹ ਲੈ ਕਿ ਪਤਾ ਜਿਹੜਾ ਬੀਜੇ ਲਪਾਈ ਉਹ ਹੀ ਖਾਣੇ ਦਾ ਕੱਤਰ ਬੀਜੂ ਜੱਟ ਦਾ ਬਜ਼ੁਰਗੀ ਦੀ ਬੇੜੀ ਫਿਰ ਪਾਣ ਦਾ ਦਾ ਦਾਖ ਬਜੋਰੀਆਂ ਤੇ ਕਿਕਰ ਬੀਜਾ ਜੱਟ ਤੇ ਉਹਦੇ ਖੱਡੇ ਖਾਲੀ ਨੁਕਾ ਖਾਲੀ ਲੋਕੋੜੀ ਬਜੋਰੀ ਦੇ ਦਾਖਾਂ ਨਹੀਂ ਮਿਲਣੀਆਂ ਫਿਰ ਤਾਂ ਜੇ ਨਾ ਬੀਜਣਾ ਨਾ ਬੀਜਣਾ ਬੀਜ ਲੈ ਔਗੜ ਬੀਜ ਦੇ ਦੀ ਫਸਲ ਹੋ ਜਾਵੇ ਠੀਕ ਹੈ ਜੀ ਇਹਦਾ ਕੀ ਭਾਵ ਬਣਦਾ ਜੀ ਕਰਤਾ ਲਿਖੀ ਪਾਇਆ ਕਰਤੇ ਨੇ ਤਾਂ ਲੈ ਕੇ ਸਿੱਧਾ ਪਾਇਆ ਹੋਇਆ ਵੀ ਜਿਹੜਾ ਤੈਨ ਬੀਜਣਾ ਉਹ ਪਊ ਅੱਛਾ ਐਤਾ ਨਹੀਂ ਵੀ ਕਰਤੇ ਨੇ ਸਾਡੇ ਵਾਸਤੇ ਲਿਖਿਆ ਸੀ ਨਾ ਨਾ ਨਾ ਸਾਬਾ ਸੇ ਕੋਈ ਸੁਲ ਅੱਬਾ ਤਿਆਰ ਆਂ ਤੇ ਲਿਖੇ ਪਾਤਾ ਤੇ ਬੈਨ ਲੱਗਾ ਜੇ ਤੂੰ ਵੀ ਜੇ ਨਾ ਕੋਈ ਵੱਡੇਗਾ ਹੋਈ ਖਾ ਲਈ ਕਿਕਰਾਂ ਵੀ ਜੇ ਨਾ ਹੋ ਕਿਕਰਾਂ ਵੱਢ ਲਈ ਕੱਟੇ ਖਾ ਲਈ ਜੋ ਕਰ ਕਰਦੇ ਉਹ ਖਾ ਲਈ ਤੁੱਕੇ ਖਾ ਲਈ ਤੇ ਤਾਂ ਕੁਝ ਇਹ ਕਿ ਕਿ ਜੋ ਲਿਖੀ ਹੈ ਕਰਤਾਰ ਦਾ ਹੁਕਮ ਹੈ ਉਹ ਹੈ ਕਿ ਜੋ ਬੀਜੇਗਾ ਉਹ ਹੀ ਖਾਣਾ ਪਏਗਾ। ਹਾਂ ਜੀ ਬੀਜਣਾ ਬਾਹਰ ਖੇਤੀ ਦਾ ਕਈ ਵਾਰ ਬੀਜਿਆ ਹੋਇਆ ਨਸ਼ਬੀ ਹੋ ਜਾਂਦੀ ਹੈ। ਠੀਕ ਹੈ ਜੀ ਪਰ ਇਹ ਗੱਲ ਨਹੀਂ ਹੈ ਕਿ ਪਹਿਲਾਂ ਹੀ ਕੁਝ ਲਿਖ ਕੇ ਪਾਇਆ ਸੀ ਅਸੀਂ ਉਹੀ ਕਰ ਰਹੇ ਹਾਂ। ਪਹਿਲਾਂ ਅਸੀਂ ਲਿਖ ਕੇ ਪਾਇਆ ਹੋਇਆ ਨਹੀਂ ਉਹ ਤਾਂ ਅਸੀਂ ਪਾਇਆ ਨਾ ਕਰਤੇ ਨੇ ਤਾਂ ਨਹੀਂ ਸਾਡੇ ਵਾਸਤੇ ਕੁਝ ਪਾਇਆ ਜੋ ਸਾਨੂੰ ਕਰਨਾ ਪੈ ਰਿਹਾ ਵਰਤਨ ਹੋ ਲਿਖ ਕੇ ਪਾਇਆ ਰੂਪ ਦਾ ਇਹ ਆਇਆ ਬੀਜ ਨੂੰ ਲਿਖ ਕੇ ਲਿਆਇਆ ਉਹ ਕਹਿੰਦਾ ਪਾ ਗਾਲ ਦੇਖ ਲੋ ਜੇ ਨਾ ਆਪਣਾ ਬੀਜ ਜਿਹੜਾ ਕੋਈ ਦੁਆ ਆਪਣੇ ਵੱਲੋਂ ਪਾਇਆ ਉਹ ਇਨਸਟ੍ਰਕਸ਼ਨ ਠੀਕ ਹੈ ਜੀ ਮਿਲਿਆ ਗਿਆਨ ਪਦਾਰਥ ਵਾਸਤੇ ਪਰ ਜੇ ਇਹਨਾਂ ਕੀਤਾ ਜੋ ਬੀਜਾਂ ਦਾ ਵੱਡੇ ਹਫਤਿਆਂ ਇੱਥੇ 15ਵੀਂ ਪੌੜੀ ਸਮਾਪਤੀ ਹੈ ਜੀ